ਸ਼ਲੋਕ ਮਹੱਲਾ ਪਹਿਲਾ ਮਹਿਲ ਕੁਚਜੀ ਮੜਵੜੀ ਕਾਲੀ ਮਨੋਕਸੁੱਧ ਜੇ ਗੁਣ ਹੋਵਣ ਤਾਂ ਨਾਨਕ ਅਵਗੁਣਮੁੰਦ ਮਹਿਲ ਕੁਚੱਜੀ ਮੜਵੜੀ ਇਹ ਜਿਹੜੀ ਕੁਚੱਜੀ ਇਹ ਰਬੁੱਦੀ ਪੁੱਠੀ ਪਾਸੇ ਲੱਗੀ ਹੋਈ ਹੈ ਕੁਚੱਜੀ ਇਹ ਅਜੇ ਨਹੀਂ ੜੂ ਜਿਹੜੂ ਸਮਝ ਨਹੀਂ ਆ ਬੁੱਤੀ ਦਾ ਮਾਰਗ ਦਈ ਹੈ ਹੋਰੇ ਹੋਰੇ ਕਦ ਲੱਗੀ ਹੈ ਕਰਪਤਰ ਵਿੱਚ ਮੜਵੜੀ ਮਾਇਆ ਦੇ ਨਾਲ ਜੁੜੀ ਹੋਈ ਹੈ ਪਰਮ ਦੇ ਵਿੱਚ ਹੈ ਇਹ ਬਹੁਤ ਹੁੰਦਾ ਜੀ ਮੜੀ ਹੋਇਆ ਮਾਇਆ ਦੇ ਵਿੱਚ ਸਰੀਰ ਚ ਮੜੀ ਗਈਆਂ ਨਾ ਅੱਛਾ ਜੀ ਤੇ ਮੜੀ ਹੈ ਸਰੀਰ ਮੜੀ ਹੋਇਆ ਇਹਦੇ ਚ ਮੜੀ ਹੋਈ ਹੈ ਚਮ ਹੱਡ ਮਾਸ ਤੇ ਵਿੱਚ ਮੜੀ ਹੋਈ ਹੈ ਆਪ ਨੂੰ ਸਰੀਰ ਸਮਝਦੀ ਕਾਲੀ ਮਨੋਕੁਸ਼ ਸੁਧ ਕਾਲੀ ਹੈ ਮਨੋਕੁਸ਼ ਸੁਧ ਮਨੋਕੁਸ਼ ਹੈ ਮਨ ਕਾਲਾ ਜੇ ਗੁਣ ਹੋਵਣ ਤਾਂ ਪਿਰ ਰਵੇ ਨਾਨਕ ਆਪ ਗੁਣਮੰਦ ਜੇ ਗੁਣ ਪੈਦਾ ਕਰ ਲਵੇ ਆਪਣੇ ਅੰਦਰ ਗੁਣ ਨੂੰ ਤਾਂ ਫਿਰ ਦੇ ਨਾਲ ਜੁੜ ਜਵੇ ਤਾਂ ਫਿਰ ਉਹ ਰਵੇ ਉਹਦੇ ਨਾਲ ਹੋ ਜਵੇ ਨਾਨਕ ਆਪ ਗੁਣ ਗੁਣ ਜਿਹੜੇ ਨੇ ਛੱਡ ਦਵੇ ਇਹਨਾਂ ਨੂੰ ਬੰਦ ਕਰ ਦਵੇ ਇਹਨਾਂ ਨੂੰ ਗੁੰਦਾ ਲਾਗਵੇ ਨਾ ਕੋਲ ਆਪ ਗੁਣ ਨੂੰ ਰੋਕ ਦਵੇ ਗੁਣ ਪੈਦਾ ਕਰ ਲਵੇ ਹਾਂਜੀ ਮਹੱਲਾ ਪਹਿਲਾ ਸਾਚ ਸੀਲ ਸਚ ਸੰਜਮੀ ਸਾ ਪਰਵਾਰ ਨਾਨਕ ਐਨਿਸ ਸਦਾ ਭਲੀ ਫਿਰ ਕਹਿ ਹੇਤ ਪਿਆਰ ਸਾਚੇ ਸੀਲ ਸੱਚ ਸੰਜਮੀ ਸਾਚ ਸੀਲ ਵਿਕਲਤਾ ਹੋਵੇ ਸਚਿਆਰੀ ਹੋਵੇ ਸੱਚ ਦਾ ਸੰਗਵ ਕਰਨ ਵਾਲੀ ਹੋਵੇ ਸੱਚ ਇਕੱਠਾ ਕਰਨ ਵਾਲੀ ਹੋਵੇ ਥੋੜਾ ਥੋੜਾ ਕਰਕੇ ਇਕੱਠਾ ਕਰਨਾ ਸੱਚ ਸੰਖੇ ਬਹੁਤ ਥੋੜਾ ਥੋੜਾ ਇਕੱਠਾ ਕਰੇ ਕਰੇ ਸੱਚੇ ਹੈ ਪੂਰੀ ਮੰਨੀ ਜਾਂਦੀ ਹੈ ਉਹਦ ਪੂਰੀ ਆ ਕਰੀ ਜਾਂਦੇ ਆਖਰ ਪਰਵਾਸ ਤੇ ਕੇ ਪੂਰੀ ਹੋ ਜਾਂਦੀ ਹੈ ਗੁੜਨ ਗੁਧ ਹੋ ਜਾਂਦੀ ਨਾਨਕ ਐਨੇ ਸ ਸਦਾ ਭਲੀ ਫਿਰਕੇ ਇਹ ਪਿਆਰ ਉਹ ਸਦਾ ਹੀ ਭਲੀ ਹੈ ਐਨੇ ਸ ਲਗਾਤਾਰ ਕਿਸੇ ਬੜੇ ਵੀ ਬੁਰੀ ਨਹੀਂ ਹੈ ਕਿਸੇ ਸੈਕਿੰਡ ਦੇ ਇੱਕ ਪਲ ਵਾਸਤੇ ਵੀ ਬੁਰੀ ਨਹੀਂ ਹੈ ਫਿਰ ਕਿਹੇ ਪਿਆਰ ਜੇ ਸੱਚ ਨਾਲ ਪਿਆਰ ਹੈ ਉਹਦਾ ਤੇਰੇ ਤੇ ਸੱਚ ਨੂੰ ਕਹਾਂਗੇ ਸੱਚ ਸਭ ਨਾਲ ਨਾਲ ਪਿਆਰ ਹੈ ਠੀਕ ਹੈ ਜੀ ਸਾਹ ਭਲੀ ਹੈ ਸਦਾ ਭਲੀ ਰਹਿਣੇ ਪਿਆਰ ਹਾਂ ਜੀ ਆਪਣਾ ਆਪ ਪਛਾਣਿਆ ਨਾਮ ਨਿਦਾਨ ਪਾਇਆ कृपा करके अपनी गुरु शब्दी मिलाया कपड़ा पहचानया जिने अपना पहचान ले nope, नाम ने धान पाया यही तो नाम ने धान पौना आ तम ज्ञान होना नाम ने धान पौना एको ही गल है आधवा गा रे आन हो गया कृपा करके अपने गुरु शब्द मिलाया ओने और कृपा कीती शब्द गुरु नाम मिला ले तुरकी नाम ਠੀਕ ਹੈ ਜੀ ਆਪਣਾ ਆਪ ਕੀ ਭਾਵ ਬਣਦਾ ਜੀ ਆਪਣੇ ਮੂਲ ਨੂੰ ਪਛਾਣਿਆ ਆਪਣੇ ਆਪ ਪਹਿਲਾਂ ਤਾਂ ਅਤਤ ਜੋ ਭਾਨ ਪਛਾਣਿਆ ਪਹਿਲਾਂ ਹੁੱਦੇ ਨੇ ਆਪਣੇ ਮਨ ਨੂੰ ਪਛਾਣਿਆ ਫਿਰ ਜਿਹਦਾ ਮਨ ਹੈ ਉਹਨੂੰ ਪਛਾਣਿਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਗੁਰ ਕੀ ਬਾਣੀ ਨਿਰਮਲੀ ਨਿਰਮਲੀ ਹਾਰ ਦਾਸ ਪੀ ਆਇਆ ਇਹ ਜੋ ਹਾਰ ਦਾਸ ਪੀਤਾ ਠੀਕ ਹੈ ਜੀ ਇਹ ਗੁਰ ਬਾਣੀ ਤੋਂ ਹਾਰ ਦਾਸ ਪੀ ਲਿਆ ਗੁਰ ਬਾਣੀ ਜੋ ਹਾਰ ਦਾਸ ਪੀਤਾ ਜਾਣਾ ਸੋਚ ਸਮਝ ਹੀ ਸਮਝ ਆ ਗਈ ਠੀਕ ਠੀਕ ਹਾਰ ਦਾਸ ਪੀ ਲਿਆ ਹਾਰ ਦਾਸ ਕਿੰਨੀ ਚਾਖਿਆ ਅੰਨ ਦਾਸ ਠਾਗਰ ਹੋਇਆ ਪਰ ਦੂਜੇ ਫਿਰ ਮਾਇਆ ਦੇ ਰਸਾਂ ਕੋ ਰੁਕ ਜਾਂਦਾ ਮਾਇਆ ਦੇ ਰਸਾਂ ਤੋਂ ਸਾਡੀ ਦੁੱਤੀ ਨਹੀਂ ਰਹਿੰਦੀ ਜਿਹੜਾ ਹਰਾ ਚਾਕਲੇਟ ਹੈ ਉਹ ਰਸ ਪੀਏ ਰਸ ਪੀਏ ਨਾ ਇਹ ਰਸ ਪਾਵਾਂ ਜਿਹੜੇ ਪਹਿਲੇ ਰਸ ਨੇ ਨਾ ਸੰਸਾਰ ਦੇ ਉਹ ਹੀ ਉਹਦੇ ਫਿਰ ਚੰਗੇ ਲੱਗਦੇ ਹਾਂਜੀ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਜਿਹਨੇ ਹਰ ਰਸ ਪੀ ਲਿਆ ਤ੍ਰੇਪਤ ਹੋ ਗਿਆ ਆਨੰਦ ਹੋ ਗਿਆ ਤੇ ਤ੍ਰਿਸ਼ਨਾ ਭੁੱਖ ਖਤਮ ਹੋ ਗਈ ਉਹਨਾਂ ਦੀ ਗਵਾਇਆ ਜਿਹਨੇ ਹਰ ਰਸ ਪੀ ਲਿਆ ਉਹਦੇ ਤ੍ਰਿਸ਼ਨਾ ਭੁੱਖ ਨਹੀਂ ਰਹਿੰਦੀ ਖਤਮ ਹੋ ਜਾਂਦੀ ਹੈ ਤਾਂ ਜਾਂ ਇਹ ਤਰੀਕੇ ਨਾਲ ਦ੍ਰਿਸ਼ਣ ਭੁਖ ਜਾਂਦੀ ਹੈ ਹਰ ਰਸ ਫਿਰ ਬੁੱਧੀ ਦੀ ਖੇਡ ਹੈ ਜੀ ਬੁੱਧੀ ਨੇ ਪੀਣਾ ਹਰ ਰਸ ਹੋਰ ਪੀਣਾ ਬੁੱਧੀ ਨੇ ਪੀਣਾ ਹੋਰ ਕੌਣ ਪੀਓ ਉਹ ਤਾਂ ਬਣਜੀ ਤਾਂ ਹੀ ਪੀਓ ਕਿਉਂਕਿ ਕੋਈ ਸੰਸਥਾਮ ਵਾਲੇ ਕਹਿੰਦੇ ਆ ਕਿ ਜੀਵ ਨੂੰ ਰਸ ਆਉਂਦਾ ਹੈ ਜੀ ਨਾਮ ਦਾ ਉਹਨਾਂ ਨੂੰ ਆਉਂਦਾ ਹੋਊਗਾ ਤਾਂ ਦੱਸੋ ਫਿਰ ਇਹ ਗਿਆਨ ਦਾ ਰਸ ਹੈ ਠੀਕ ਹੈ ਜੀ ਗਿਆਨ ਦਾ ਰਸ ਹੈ ਤੁਹਾਨੂੰ ਦੱਸਦਾ ਰਾਮ ਉਹਦਾ ਰਸ ਹੈ ਗਿਆਨ ਦਾ ਰਸ ਹੈ ਬੁੱਧੀ ਨੂੰ ਦੱਸਦਾ ਬੋਲਰ ਨੂੰ ਆਉਣਾ ਹੋਊਗਾ ਕਹ ਦੱਸੋ ਫਿਰ ਹੋ ਜਾਤਾ ਦੱਸੋ ਹੀ ਤਿਆਰ ਹੋ ਜੂਗਾ ਦੁਨੀਆ ਨੂੰ ਕੇ ਜਿਹਾਉਂਗਾ ਫਿਰ ਤਾਂ ਸੌਖਾ ਹੀ ਹੈ ਕੰਮ ਰਸ ਪੀ ਸਦਾ ਤ੍ਰਿਪਤ ਸੰਤੋਖ ਆ ਗਿਆ ਹੈ ਫਿਰ ਆਨੰਦ ਆ ਗਿਆ ਫਿਰ ਤਿਸ਼ਨਾ ਭੁੱਖ ਗਵਾ ਤਿਸ਼ਨਾ ਭੁੱਖ ਨਹੀਂ ਆ ਪੁੱਛੋ ਕਿ ਇਹਦੇ ਭੁੱਖ ਗਈ ਹੈ ਤੁਹਾਡੇ ਚੋਂ ਜਿਹਨੂੰ ਰਸ ਆਇਆ ਜੇ ਨਹੀਂ ਗਈ ਤਾਂ ਫਿਰ ਹੋਰੇ ਕੁਝ ਹੀ ਲਿਆਊਗਾ ਸ਼ੰਕਾਰ ਦੇ ਨਸ਼ੇ 'ਚ ਕੁਝ ਹੋਰ ਵੀ ਜਾਂਦੇ ਨੇ ਇੱਥੇ ਪੰਜਵੀਂ ਪੌੜੀ ਸਮਾਪਤ